श्लोक भावी उदोत करण हर रमणंग संयोग पूर्ण गोपाल दर्श भेटंग सफल नानक सो मुहूर्त है हां भावी उदोत करण हां जी हर रमणंग ਉਹਨਾਂ ਨੇ ਵੀ ਜੋਗ ਬਣਾਇਆ ਨਾ ਪੂਰਾ ਜੋ ਬ੍ਰਾਹਮਣੀ ਵਤਾਲੇ ਨੇ ਜਿਹੜੇ ਜੋਤਸੀ ਵਗੈਰਾ ਨੇ ਉਹ ਜਿਹੜਾ ਉਹਨਾਂ ਦਾ ਦੱਸਿਆ ਵੀ ਉਹ ਨਹੀਂ ਹੈਗਾ ਕੋਈ ਮਹੂਰਤ ਵਾਰਤ ਉੱਥੇ ਉਹ ਸਭ ਝੂਠਾ ਹੈ ਉਹਨਾਂ ਦਾ ਭਾਵੇਂ ਇਹ ਦੋਤ ਕారణ ਜਦੋਂ ਤੁਹਾਡਾ ਭੱਗਿਆ ਦੋਤ ਹੁੰਦਾ ਨਾ ਯਾਨੀ ਅੰਦਰ ਗਿਆਨ ਵਧਣ ਲੱਗਦਾ ਜਿੱਥੇ ਬੁੱਧੀ ਖੜੀ ਹੁੰਦੀ ਉਹਦੇ ਜਗਾਹ ਟੁਰਦੀ ਆ ਭੱਗਿਆ ਦੋਤ ਹੁੰਦਾ ਭਾਵੇਂ ਇਹ ਕਹਿੰਦੇ ਨੇ ਹਰ ਰਮਣ ਸੰਯੋਗਪੂਰਨ ਇਹੀ ਜਦ ਹਰਦੇ ਨਾਲ ਪਰ ਇੱਕ ਆਪਣੇ ਮੂਰ ਨਾਲ ਜੁੜਦਾ ਜਾਗ ਭਾ ਗਿਆ ਦੋਸਤ ਹੰਦਾ ਤਾਂ ਇਹ ਚਲਦੀ ਅਬਦੀ ਤਾਂ ਅਗੇ ਗਿਆਨ ਵਧਣ ਲੱਗਦਾ ਹੈ ਮਨ ਦੇ ਨਾਲ ਕਿੱਤ ਦਾ ਜੋੜ ਹੋ ਜਾਣਾ ਜੁੜਿਆ ਰਹਿਣਾ ਹੀ ਸੰਯੋਗ ਹੈ ਪੂਰਣਾ ਇਹ ਕਿਹ ਹੈ ਇਹ ਗਿਆਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਹ ਪੂਰਣ ਬ੍ਰह्म ਬਣਦਾ ਫਿਰ ਬ੍ਰह्म ਤੋਂ ਇਹੀ ਦਾ ਪੂਰਣ ਬ੍ਰਹਮਾਂ ਦੇ ਨਿਸ਼ਾਨੇ ਆ ਇਹ ਜਦ ਰਿਕਨ ਆਪਰ ਤੋਂ ਪੂਰਨ ਬ੍ਰਹਮੰਡ ਹੈ ਇਹ ਪੂਰਨ ਆ ਪੂਰਨ ਦਾ ਮਤਲਬ ਹੈ ਜੋ ਗਿਆਨ ਦੀ ਕਮੀ ਹੈ ਉਹ ਪੂਰੀ ਹੋ ਜਾਣੇ ਪ੍ਰਕਾਸ਼ ਤਿੰਨ ਲੋਕ ਦਾ ਗਿਆਨ ਗੁਰਬਾਣੀ ਚ ਸਾਡੀ ਗੁਰਬਾਣੀ ਦੀ ਖੋਜੀ ਹੋ ਜਾਣੀ ਸੰਯੋਗ ਪੂਰਨ ਗੋਪਾਲ ਦਰਸ਼ਪੇਟੰ ਬਸ ਗੋਪਾਲ ਦਾ ਦਰਸ਼ਨ ਹੋ ਜਾਂਦਾ ਹੈ ਆਤਮ ਦਰਸ਼ਨ ਹੋ ਜਾਂਦਾ ਹੈ ਸਫਲ 400 ਮਹੂਰਤ ਜਿਸ ਵੇਲੇ ਗੋਪਾਲ ਦਾ ਦਰਸ਼ਨ ਦਾ ਗਿਆਨ ਤੋਂ ਬਾਅਦ ਉਹ ਮਹੂਰਤ ਹੈ ਗਿਆਨ ਤੋਂ ਬਾਅਦ ਜਦ राम ਦਾ ਦਰਸ਼ਨ ਹੁੰਦਾ ਫੇਰ ਨਹੀਂ ਮਰਦਾ ਫੇਰ ਮਰ ਕੇ ਨਹੀਂ ਜਾਂਦਾ ਮਰ ਮਰ ਗਏ ਜਿਹਨਾਂ राम ਨੂੰ ਜਾਣਿਆ ਜਿੰਨਾ ਚਿਰ राम ਨੂੰ ਜਾਣਿਆ ਨਹੀਂ ਜਾਂਦਾ ਜਦ ਉਹਨਾਂ ਚਿਰ ਮਰ ਮਰ ਜਾਂਦੇ ਨੇ ਜਦੋਂ राम ਨੂੰ ਜਾਣ ਲੰ다 ਫਿਰ ਮਰਦਾ ਹੀ ਨਹੀਂ ਇਸ ਕਰਕੇ राम ਨੂੰ ਜਾਨਣਾ ਜਦੋਂ ਰਾਮ ਦੀ ਸਮਝ ਆਉਂਦੀ ਹੈ ਉਦ ਬਦਲੀ ਤੇ ਸਮਝੋ ਹੰਤੀ ਉਦ ਬਦਲੀ ਬਦਲ ਜਾਂਦੀ ਹੈ ਜਦ ਬਵੇਕ ਬੁੱਧ ਹੋ ਜਾਂਦੀ ਹੈ ਉਹ ਜੋ ਸਮਝੋ ਉਹ ਮਹੂਰਤ ਜੀ ਹਾਂ ਜੀ ਤੇ ਹੁਣ ਇਹ ਤਾਂ ਹੁੰਦਾ ਠੀਕ ਹੈ ਜੀ ਵੱਡਾ ਇਹ ਨਾ ਪ੍ਰਭਾਤ ਤੋਂ ਸ਼ੁਰੂ ਹੋ ਕੇ ਫਿਰ ਹੁਣ ਸਿਖਰ ਤੱਕ ਜਾਏਗੀ ਗੱਲ ਉਹ ਹਾਂ ਠੀਕ ਹੈ ਹਾਂਜੀ ਕੀਮ ਪਾਏ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹਿਬ ਦੀ ਪ੍ਰਵਾਨ ਜਿਤ ਮਿਲੰਦੜੋ ਮਾਂ ਪੇਰੀ ਕੀਮ ਨਾ ਪਾਏ ਸੁਖ ਮਿਤੀ ਹੂੰ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਮਿਤੀ ਅੰਦਾਜ਼ੇ ਨੂੰ ਕਹਿੰਦੇ ਨੇ ਅੰਦਾਜ਼ੇ ਤੋਂ ਜ਼ਿਆਦਾ ਸੁਖ ਨੇ ਕਿੰਨੇ ਅਸੀਂ ਸਪਾਹਾਂ ਅੰਦਾਜ਼ਾ ਨਹੀਂ ਲਾ ਸਕਦੇ ਉਹਨੇ ਸੁਖ ਨੇ ਲੱਗੇ ਤਾਂ ਵੀ ਬਹੁਤ ਜ਼ਿਆਦਾ ਸੁਖ ਨੇ ਵਰਦੇ ਬਾਹਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਨਾਨਕ ਕਹਿੰਦਾ ਉਹ ਵੇਲਾ ਪ੍ਰਵਾਨ ਹੈ ਉਹ ਮਹੂਰਤ ਦਰਗਾਹ ਚ ਤਾਂ ਪੰਡਤ ਦਾ ਪ੍ਰਵਾਨ ਸੀ ਤਾਂ ਮਹੂਰਤ ਮਨਮੁਖਾਂ ਦਾ ਪ੍ਰਵਾਨ ਕੀਤਾ ਆਇਆ ਉਹ ਤਾਂ ਮਾਇਆ ਦੇ ਵਿੱਚ ਸਭ ਮਾਇਆ ਦੀ ਇੱਛਾਾਂ ਦੀ ਗੱਲ ਹੈ ਹਾਂਜੀ ਨਾਨਕ ਸਾ ਵੇਲੜੀ ਪ੍ਰਵਾਨ ਜਿਤ ਮਿਲੰਦੜੋ ਮਾਂ ਪੇਰੀ ਮਾਂ ਦਾ ਭਾਵ ਕੀ ਬਾ ਦਾ ਮੇਰਾ ਮਾਂ ਪੇਰੀ ਮਾਂ ਨਹੀਂ ਹੈ ਮੇਰਾ ਪਤੀ ਜਿਤ ਮਿਲੰਦੜੋ ਮੇਰਾ ਹਾਂਜੀ ਔੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਫਾ ਬੋਵਾ ਕਹੋ ਕੌਣ ਹੈ ਉਹ ਦੱਸੋ ਵੇੜਾ ਕਿਹੜਾ ਹੋਇਆ ਫਿਰ ਜਿਹਨੂੰ ਅਮਰਤ ਵੇਲਾ ਕਹਿੰਦੇ ਨੇ ਇਹਨਾਂ ਦਾ ਸਾਰਾ ਹੀ ਕਟਿਆ ਗਿਆ ਉੱਥੇ ਅਮਰਤ ਵੇਲਾ ਇਹ ਅਮਰਤ ਕੌਣ ਆ ਜਿਤ ਪ੍ਰਭ ਕੋ ਭਾਈ ਪ੍ਰਾਪਤੀ ਆ ਉਹੀ ਅਮਰਤ ਵੇਲਾ ਹੋਰ ਅਮਰਤ ਵੇਲਾ ਕੌਣ ਅਮਰਤ ਕੌਣ ਅਮਰ ਕੌਣ ਰਬ ਅਮਰ ਹੈ ਅਮਰ ਦੀ ਪ੍ਰਾਪਤੀ ਹੀ ਅਮਰਤ ਵੇਲਾ ਹੈ ਪ੍ਰਭ ਦੀ ਬਾਣੀ ਅਮਰਤ ਬਾਣੀ ਹੈ ਜੇ ਬਿਰੂ ਦੱਸੂਗਾ ਜਿਆਨੂ ਕਹੂੰਗਾ ਅਮਰਤ ਮੇਲਾ ਹੋਈ ਹੈ। ਉਹ ਮਹੂਰਤ ਭਲਾ, ਉਹੀ ਮਹੂਰਤ ਭਲਾ। ਮਹੂਰਤ ਹੁੰਦਾ ਹੋਈ ਢੜੀ ਸੰਧ। ਭਲਾ ਸੰਦਰਯੋਗ ਹੈ। ਉਹੀ ਭਲਾ ਸੰਯੋਗ ਹੈ। ਜਿੱਤ ਮੇਲੇ ਗੁਸਾਂਗ ਜਦੋਂ ਗੁਸਾਂਗ ਮਿਲੂਗਾ। ਹੋਰ ਉਹ ਮਹੂਰਤ ਦਾ ਕੁੜੀਆਂ ਮੁੰਡਿਆਂ ਦੇ ਵਿਆਹ ਦਾ ਹੋਵੇ। ਹਾਂਜੀ। ਇਹਦਾ ਕੁੜੀ ਮੁੰਡੇ ਦੇ ਵਿਆਹ ਨਾਲ ਕੀ ਸੰਬੰਧ ਹੈ ਜੀ? ਕੋਈ ਤਾਂ ਸੁਰਤ ਸ਼ਬਦ ਦਾ ਮੇਲਾ। ਨਹੀਂ ਲਾਹਾਂ ਵੀ ਤੁਸੀਂ ਕੱਢ। ਇਹਨਾਂ ਨੇ ਪੰਡਤਾਂ ਨੇ ਪੰਡਤਾਂ ਦਾ ਕੰਮ ਕਰ ਲਿਆ ਤੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਜੇ ਗੁਸਾਈ ਮਿਲੂਗਾ ਜਾਂ ਗੁਸਾਈ ਵਾਸਤੇ ਔਰਤ ਵਾਸਤੇ ਸੀ ਵਾਸਤੇ ਤਾਂ ਹੈ ਜੇ ਆਪਣੇ ਮੂਲ ਨੂੰ ਗੁਸਾਈ ਕੇ ਜੀ ਹਾਂਜੀ ਹਾਂ ਆਠ ਪਹਿਰ ਹਰ ਧਿਆਇਕ ਹੈ ਮਨ ਇੱਚ ਪੁਜਾਈ ਵੱਡੇ ਭਾਗ ਸਤ ਸੰਗ ਹੋਏ ਲਾਗਾ ਪਾਈ ਅੱਤ ਪਾਣ ਹਾਲ ਨੂੰ ਧਿਆਨ ਹੱਤ ਹਾਲ ਦੇ ਵਿੱਚ ਧਿਆਨ ਧਾਰ ਕੇ ਤਾਂ ਪੁਜਾਈ ਮੰਦੀ ਇੱਥਾ ਪੂਰੀ ਹੋਈ ਹੈ ਵੱਡੇ ਭਾਗ ਸਤ ਹੋਏ ਨਿਵ ਲਾਗਾ ਪਾਈ ਸਾਡੇ ਨੀਵਕੇ ਪੈਰੀਂ ਲੱਗਿਆ ਵੱਡੇ ਭਾਗ ਨੇ ਸਤ ਤਾਂ ਹੋਇਆ ਸੱਚ ਨਾਲ ਜੁੜਿਆ ਸਤ ਸੰਗ ਤਾਂ ਮਿਲਿਆ ਜੇ ਲਾਗਾ ਨੀਵਾ ਹੋਇਆ ਮਨ ਉਹ ਨੋ ਹੋਣਾ ਪੈਣੀ ਜਿਵੇਂ ਸਭਔਰਕ ਲਾਗਾ ਪਹਿਨੀਵਾ ਤਾਂ ਹੁੰਦਾ ਹੀ ਨਹੀਂ ਹਾਂਜੀ ਮੰਨ ਦਰਸ਼ਨ ਕੀ ਬਲ ਜਾਣ ਜਿਵੇਂ ਮਨ ਵਿੱਚ ਦਰਸ਼ਨ ਦੀ ਪਿਆਸ ਹੈ ਨਾਨਕ ਉਹ ਤੋ ਕੁਰਬਾਨ ਮਨ ਵਿੱਚ ਦਰਸ਼ਨ ਦੀ ਪਿਆਸ ਹੈ ਨਾਨਕ ਤੇ ਭਲਿਆ ਜਾਂਦਾ ਠੀਕ ਹੈ ਜੀ ਇੱਥੇ 15ਵੀਂ ਪੌੜੀ ਦੀ ਸਮਾਪਤੀ ਹੈ ਜੀ